ਕਿ ਲੋਕ ਮਹੱਲਾ ਤੀਜਾ ਸਾਹਿਬ ਮੇਰਾ ਸਦਾ ਹੈ ਜਿਸ ਸੇਬਦ ਕਮਾਏ ਸਾਹਿਬ ਮੇਰਾ ਸਦਾ ਹੈ ਜਿਸੇ ਸ਼ਬਦ ਕਮਾਏ ਜਿਹੜਾ ਸ਼ਬਦ ਦੀ ਕਮਾਈ ਕਰ ਲੈਂਦਾ ਨਾ ਸ਼ਬਦ ਨੂੰ ਸਮਝ ਲੈਂਦਾ ਇਹਨੂੰ ਰਿੜ ਕਮਾਈ ਇਹਦੀ ਇਹਨੂੰ ਰਿੜ ਕਗੇ ਜੋ ਵਖਣ ਪ੍ਰਾਪਤ ਕਰ ਲੈਂਦਾ ਉਹਨੂੰ ਸਾਹਿਬ ਹੈਗਾ ਦੀਦਾ ਹੈ ਕਿ ਉਹ ਹੈਗਾ ਦੁੱਧ ਵਿੱਚ ਦੀਦਾ ਨਹੀਂ ਪਰ ਜਿਹੜਾ ਪ੍ਰਾਪਤ ਕਰ ਲੈਂਦਾ ਉਹਨੂੰ ਦੀ ਵੀ ਜਾਂਦਾ ਹੈ ਦੁੱਖਣ ਪ੍ਰਾਪਤ ਕਰੂ ਜਿਹੜਾ ਉਹ ਇਹ ਦੇਖੂ ਉਹ ਉਹਦ ਉਹਨੂੰ ਕਦੇ ਦੇਖੂ ਉਹ ਉਹ ਹਾਨੀ ਕਦੇ ਨਹੀਂ ਨਾ ਆਵੇ ਨਾ ਜਾਏ ਉਹ ਆਲਗੀ ਆਪਣੇ ਰੇਲ ਦਾ ਹੋਰ ਕੋਈ ਨਹੀਂ ਰਖਦਾ ਉੱਥੇ ਪਤਾ ਕੀ ਕਟਿਆ ਮਾਂ ਕਿ ਸਕਦਾ ਪਰ ਇੱਕ ਤਾਂ ਹੀ ਸੰਸਾਰ ਪੈਦਾ ਹੋਇਆ ਜੋਤ ਚਾਤਾ ਲੱਗਤੀਜ ਜੋਤੋ ਕੋ ਕੋ ਹੁਕਮ ਤੋਂ ਸੰਸਾਰ ਪੈਦਾ ਹੋਇਆ। ਕਿ ਕੋ ਹੁਕਮ ਤੋਂ ਸੰਸਾਰ ਪੈਦਾ ਹੋਇਆ ਉਹਦੇ ਮੁਕਾਬਲੇ ਦਾ ਦੂਸਰਾ ਕੋਈ ਹੁਕਮ ਹੈ ਨਹੀਂ। ਜਿਹੜਾ ਕਾਲ ਵੀ ਹੈ ਨਾ ਕਾਲ। ਕਾਲ ਦਾ ਹਾਂ ਨਹੀਂ ਦੀਆਂ ਕੋਈ। ਅਕਾਲ ਤਾਂ ਉਹ ਉਹ ਤਾਂ ਪੈਦਾ ਹੋਇਆ ਹੈ ਚੀਜ਼ ਹੈ ਨਾ। ਅਕਾਲ ਉਹ ਤਾਂ ਪੈਦਾ ਹੋਈ ਹੋਈ ਚੀਜ਼ ਹੈ। ਕਾਲ ਜਦ ਪੈਦਾ ਹੋਇਆ ਹੈ ਕਾਲ ਦਾ ਹਾਂ ਕੋਈ ਨਹੀਂ। ਠੀਕ ਹੈ ਕਹਿੰਦਾ ਮਤਲਬ ਵੀ ਉਹ ਕਦੇ ਵੀ ਮਰਨ ਵਾਲਾ ਨਹੀਂ ਹੈ ਹੈ ਨਾ ਮਰਦਾ ਹੀ ਹੋਣਾ ਬੱਲਾ ਕੀ ਹੈ ਕਾਲ ਮਰਦਾ ਨੀ ਕਾਲ ਪ੍ਰਗਟ ਕੋ ਉਤਉ ਹੁੰਦਾ ਹੈ ਕਾਲ ਕਾਲ ਨਾ ਮਰਦਾ ਮਰਨ ਵਾਲੀ ਦੀ ਜੀ ਹੈ ਕਾਲ ਮਰਨ ਵਾਲੀ ਦਾ ਹੈ ਉਹ ਨਹੀਂ ਜਿਹੜਾ ਅਕਾਲ ਹੈ ਇਹ ਅਕਾਲ ਦੀ ਗੱਲ ਨਹੀਂ ਹੋ ਰਹੀ ਅਕਾਲਰ ਕਾਲ ਦੋ ਰੂਪ ਨੇ ਤੇ ਇੱਕ ਸਿੱਕੇ ਦਾ ਪਹਿਲੂ ਉਗਾਲ ਹੈ ਇੱਕ ਸਿੱਕੇ ਦਾ ਪਹਿਲੂ ਕਾਲ ਹੈ ਪਰ ਉਹ ਹਾਨੀ ਵਾਸਤੇ ਕਿਹਦੇ ਵਾਸਤੇ ਗੱਲ ਆ ਰਹੀ ਉਹ ਉਹ ਹਾਨੀ ਕਦੇ ਨਹੀਂ ਹੁਕਮ ਦਾ ਹੁਕਮ ਕਦੇ ਕੋਈ ਹਾਨੀ ਜੰਮੂਗਾ ਜੰਮਿਆ ਦਾ ਹੁਕਮ ਹੈ ਫਿਰ ਫਿਰ ਆਪਾਂ ਇੱਕ ਦੀ ਗੱਲ ਕਰਦੇ ਆ ਪਰਮੇਸ਼ਰ ਦੀ ਇੱਕ ਹੈ ਜਿਹੜਾ ਉਹ ਦੀ ਕਦੇ ਗੱਲ ਨਹੀਂ ਕਰਦੇ ਜਿੱਦੇ ਇੱਕ ਨੇ ਸੱਚਖੰਡ ਵਿੱਚ ਜਿੱਨਾ ਸਾਰਿਆਂ ਦਾ ਹੁਕਮ ਆ ਉਹ ਇੱਕ ਹੁਕਮ अच्छा ओना दी गल हो रही है ओना दी गल हो रही है ठीक है ओना दा इस संसार विच आना जाना नहीं है हां जी जदों तक कोई एक ओना लगे ते ਇਹ ਕਹਿੰਦਾ ਭਾਵੇਂ ਉਹ ਆਪ ਨਾਸ਼ਵੰਤ ਨਹੀਂ ਹੈ ਪਰ ਜੋ ਸੰਸਾਰ ਦੋਨੋਂ ਨੋ ਦੋ ਦੋ ਨਾਸ਼ਵੰਤ ਦੀ ਹੈ ਉਹਨਾਂ ਦਾ ਹਾਂ ਨਹੀਂ ਕੋਈ ਨਹੀਂ ਹੈ ਉਸ ਹੁਕਮ ਪੈਦਾ ਹੋਇਆ ਉਹ ਪਹਿਲਾਂ ਕੋਈ ਹੁਕਮ ਨਹੀਂ ਸੀ ਉਹਦੇ ਬਾਅਦ ਵੀ ਕੋਈ ਹੁਕਮ ਦੀ ਪੈਦਾ ਹੋਇਆ ਵਰਮਾ ਬਿਚੂ ਸ਼ਿਬਜੀ ਦੇ ਡੋਢੋ ਉਬਲਈ ਦਾ ਮਤਲਬ ਇਹ ਨਾ ਆਵੇ ਨਾ ਜਾਏ ਠੀਕ ਹੈ ਜੀ ਅਜੋਨੀ ਹੈ ਉਹਦਾ ਇਹ ਇਹ ਕਹੇ ਸਦਾ ਸਦਾ ਸੋ ਸੇਵੀਐ ਜੋ ਸਭ ਮੈਂ ਰਹੈ ਸਮਾਇ ਜਿਹੜਾ ਸਾਰਿਆਂ ਸਭਾਇਆ ਹੋਇਆ ਸਦਾ ਸਦਾ ਉਹਦੇ ਪੜੀ ਚੱਲਣਾ ਚਾਹੀਦਾ ਉਹਦੀ ਰਾਜਾ ਵਿੱਚ ਰਹਿਣਾ ਚਾਹੀਦਾ ਅਵਰ ਦੂਜਾ ਕਿਉਂ ਸੇਵੀਐ ਜਮੈ ਤੈ ਮਰ ਜਾਏ ਨੇਫਲ ਤਿੰਨ ਕਾ ਜੀਵਿਆ ਜੇ ਖਸਮ ਨਾ ਜਾਣੈ ਆਪਣਾ ਅਵਰੀ ਕੋ ਚਿਤ ਲਾਇ ਹੋਰ ਦੂਜੇ ਉਹਨੂੰ ਛੱਡ ਕੇ ਅਵਰ ਦੂਜਾ ਕਿਉਂ ਸੇ ਵੀ ਹੈ ਤੇ ਕਾਰਨ ਦੂਜਾ ਕੌਣ ਦੂਜੇ ਜਿਹੜੇ ਤਿੰਨ ਬਣਾਏ ਨੇ ਆ ਹੋਰ ਬਣਾਏ ਨੇ ਦੂਜਾ ਕਿਉਂ ਸੇ ਵੀ ਹੈ ਜਾਨਕ ਵੀ ਉਹਨਾਂ ਦੇ ਵਿੱਚੋਂ ਹੀ ਆ ਗਿਆ ਠੀਕ ਹੈ ਜੀ ਜੰਮੇ ਜੰਮੇ ਮਰੇ ਨੇ ਉਹਨਾਂ ਨੂੰ ਕਿਉਂ ਸੇ ਵੀ ਹੈ ਜਿਹੜੇ ਜੰਮਦਾ ਮਰਦਾ ਉਹਨੂੰ ਕਿਉਂ ਸੇ ਬਣਾਣ ਨਾਲ ਕਿ ਜੰਮਿਆਂ ਵੀ ਵੀ ਆ ਕਿਵੇਂ ਸੇ ਸਕਦੇ ਆ ਪਰ ਜੰਮੇ ਨੇ ਮਰੇ ਤੇ ਨਹੀਂ ਸੇ ਸਕਦੇ ਵਾਲਿਦੇ ਹੀ ਆ ਗਿਆ ਦਿੰਦੀ ਸਾਡੂ ਹਾਂਜੀ ਹੋਰ ਲੋਕ ਜਿਹੜੇ ਬਗਵਾਸ ਕਰਦੇ ਨੇ ਪੈ ਘਰੀ ਜਾਣ ਸਾਡੂ ਕੋਈ ਪਰਵਾਹੀ ਉਹਦੀ ਨੇਫਲ ਤਨ ਕਾ ਜੀਵੇ ਆ ਜੇ ਖਸਮ ਫਲ ਤਨ ਕਾ ਜੀਵੇ ਆ ਉਹਨਾਂ ਦਾ ਗੱਲ ਦੀ ਸਮਝ ਨਹੀਂ ਆਈ ਖਸਮ ਦੀ ਆਪਣਾ ਜਾਣਿਆ ਸੱਚ ਦੀ ਜਾਣਿਆ ਜਿਨ੍ਹਾਂ ਨੇ ਅਵਰੀ ਕੋ ਲਾਏ ਹੋਰ ਨਾਲੇ ਚਿਤ ਲਾਈ ਬੈਠੇ ਕੋਈ ਕਿਸੇ ਨੂੰ ਗੁਰੂ ਬਣੇ ਬੈਠਾ ਕੋਈ ਕਿਸੇ ਦੀ ਵਰਸੀ ਬਣਾਈ ਬਨੂਦਾ ਕੋਈ ਕਿਸੇ ਦੀ ਵਰਸੀ ਬਨੂਦਾ ਉਹਨਾਂ ਦਾ ਜੀਵਨਾਂ ਹੀ ਨਿਸਫਲ ਹੈ ਕਿੰਦੀ ਘਟੀਆ ਗੱਲ ਕਹਿਤੀ ਐ ਨਾ ਬੜੇ ਬੜੇ ਸੁਲਤਾਨੂ ਇਹਨਾਂ ਸੁਲਤਾਨਾਂ ਹੀ ਜੀਵਨ ਜਾਨੇ ਭਾਲੇ ਤੇ ਸਾਧਨ ਦਾ ਜੀਵਨ ਜਿਹੜੀ ਐ ਲੱਗੀ ਗਈ ਕਿੰਨਾ ਕੁ ਫਲਦਾ ਹੈ ਕਿ ਦਾ ਜੀਵਨ ਸਾਧਨ ਨੂੰ ਦੇ ਰਹੇ ਸੋ ਵਾਸ ਦਾ ਆਪਣੀ ਹੀ ਬਲੂਲੇ ਖੋਲ ਨਾਨਕ ਏਵਨਾ ਜਪਈ ਕਰਤਾ ਕਿਤੀ ਦੇ ਸਜ਼ਾਏ ਨਾਨਕ ਕਹਿੰਦਾ ਇਹ ਨਹੀਂ ਕਹ ਅਸੀਂ ਦੱਸ ਸਕਦੇ ਕਰਤਾ ਕਿਤੀ ਸਜ਼ਾ ਦਾ ਹੋਊਗਾ ਇਸ ਅਪਰਾਧ ਦੀ ਜਿਹੜਾ ਅਪਰਾਧ ਕਰ ਲੈ ਇਹਦੇ ਨਾਲ ਅੱਖਾਂ ਵਿੱਚ ਤੇ ਇਹ ਸੁਣ ਰਹੇ ਗਣ ਦੀ ਗੱਲ ਇਹ ਨਹੀਂ ਅਸੀਂ ਕਹਿ ਸਕਦੇ ਅਪਰਾਧ ਦਾ ਇਹ ਬਲੂਗਾ ਇਹ ਇਹ ਉਹਨੂੰ ਪਤਾ ਹੈ। ਇਹਦੀ ਸਜ਼ਾ ਕਿੰਨੀ ਮਿਲੂਗੀ ਇਹ ਕਰਤਾ ਹੀ ਜਾਣਦਾ ਹੈ। ਪਰ ਸਜ਼ਾ ਮਿਲੂਗੀ ਜ਼ਰੂਰ ਹੈ ਨਹੀਂ। ਹਾਂ ਕਿੰਨੀ ਮਿਲੂਗੀ ਇਹਦਾ ਨਹੀਂ ਪਤਾ। ਸਜ਼ਾ ਇਤੋਂ ਵੱਡੀ ਸਜ਼ਾ ਹੋਰ ਕੀ ਹੈ। ਮਹਲਾ 3 ਪੱਛਾ ਨਾਨਕ ਹੁਕਮੁ ਬੁਝਿ ਪਰਵਾਣ ਹੋਇ। ਤਾ ਫਲ ਪਾਵੇ ਸੱਚ ਸੱਚਾ ਨਾਮ ਤੇ ਆਈਏ ਸੱਚਾ ਨਾਮ ਤੇ ਆਈਏ ਸੱਜੇ ਨਾਮ ਤੇ ਧਿਆਨ ਰੱਖੀਏ ਅਚਭਾ ਪਈਏ ਪ੍ਰਾਪਤ ਹੋ ਜਾਂਦਾ ਸਾਰੀ ਦੁਨੀਆ ਦਾ ਸੱਚ ਪ੍ਰਾਪਤ ਹੋ ਜਾਂਦਾ ਸਾਰੀ ਦੁਨੀਆ ਦਾ ਸੱਚ ਸਮਝ ਆ ਜਾਂਦਾ ਧਿਆਨ ਰੱਖਣ ਤੇ ਸੱਚ ਤੇ ਵਰਗੋ ਵਰਤੇ ਸਾਚੇ ਜੋ ਵਰਤਦਾ ਸੱਚਾ ਹੈ ਹਾਕੇ ਵਰਤਦਾ ਦਾ ਮਤਲਬ ਹੈ ਉਹਦਾ ਵਰਤਦਾ ਤੇ ਹੈ ਦੂਜੇ ਦਾ ਆਪਣੀ ਵਰਤਦਾ ਜੋ ਹੋ ਰਿਹਾ ਉਹ ਕੋਮਨਾ ਮਤਲਬ ਹੈ ਜੋ ਕੁਝ ਹੋ ਰਿਹਾ ਪਾ ਲਈ ਹੋ ਰਿਹਾ ਫਿਰ ਪ੍ਰਤੀਤ ਹੋ ਜਾਂਦਾ ਫਿਰ ਇਹ ਤੁਹਾਨੂੰ ਤਸੱਲੀ ਹੋ ਜਾਂਦੀ ਹੈ ਫਿਰ ਤੁਸੀਂ ਇਹ ਮੰਨ ਲੈਦੇ ਹੋ ਉਦਾਂ ਕਹਿ ਰਹੇ ਹੈ ਕਹਿਣ ਨਾਲ ਕੋ ਵਰਤੇ ਸੱਚ ਨਾਨਕ ਹੁਕਮ 부ਝ ਪ੍ਰਵਾਨ ਹੋਏ ਤਾ ਫਲ ਪਾਵੈ ਸਚ ਜੇ ਕੋ ਬੁਝਲਵੇਂ ਉੱਧਿਆ ਹੋਕ ਬੋਲਾ ਪ੍ਰਵਾਨ ਹੋਜੇ ਉਹ ਗਲਤ ਜਨਨ ਬੁਝਲਵੇਂ ਪ੍ਰਵਾਨ ਤਾਂ ਲਿਖਿਆ ਦੇਖੋ ਕੋਈ ਸਵਾਲ ਲਿਆ ਕੱਢ ਕੇ ਗਲਤ ਸੀ ਉਹ ਟੀਚਰ ਦੇ ਦਾ ਭਾਈ ਗਲਤੀ ਹੈ ਇੱਥੇ ਕੋ ਬੁਝ ਲਿਆ ਬੁਝ ਲਿਆ ਗਲਤ ਪ੍ਰਵਾਨ ਨਹੀਂ ਹੋਇਆ ਕਹਿ ਦਵਾਰਾ ਕੁਝ ਗਿਆ ਜੇ ਬੁਲਿਆ ਹੁਕਮ ਪ੍ਰਵਾਨ ਹੋ ਜਵੇ ਹਾਂਜੀ ਇਹਾਂ ਸਹੀ ਬੁਝੇ ਪਰਵਾਨ ਹੋਵੇ ਠੀਕ ਹੈ ਤਾਂ ਫਲ ਪਾਵੇ ਸੱਚ ਫੇਟਾ ਸੱਚਾ ਭੜੇ ਲਗ ਜਾਂਦਾ ਹੈ ਫੇਟਾ ਨਾਲੇ ਵਿਲ ਜਾਂਦਾ ਹੈ ਸੱਚੀ ਬਾਣੀ ਉੱਤੇ ਆਉਂਦੀ ਹੈ ਚੁਰਕੀ ਬਾਣੀ ਫੇ ਬਰਸਦਾ ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲ ਨਾ ਬੁੱਝੈ ਅੰਦਾ ਕਾਚਨੇ ਕਰ। ਕਥਨੀ ਬੋਲਨੀ ਕਰਦਾ ਬੜੀਆਂ ਬੜੀਆਂ ਗੱਲਾਂ ਕਰਦਾ ਬੜੇ ਲੈਕਚਰ ਕਰਦਾ ਬੜੇ ਰੋਜ਼ ਜਾ ਕੇ ਸ਼ਾਖੀ ਦੇ ਕਥਾ ਵਾਰਤਾ ਕਰਦਾ ਕਥਨੀ ਬਦਨੀ ਬੋਲੀ ਕਰਦਾ। ਬਾਦ ਦੇ ਵਿੱਚ ਬੜੇ ਛੇੜਦਾ ਫਲਾਵੇ ਨੇ ਕਿ ਚਾਹੀਦਾ। ਅੱਗਾ ਕਾਚੇ ਨਾਲ ਕਾਚੇ ਗੱਲਾਂ ਕਰਦਾ ਕੱਚੀ ਸਾਰੀਆਂ ਗੱਲਾਂ ਕੱਚੀਆਂ ਦੇ ਜਿੰਨਾ ਜਿਹੜਾ ਕਤਨੀ ਕਰਦਾ ਸੱਚ ਦੱਸ ਨਹੀਂ ਸਕਦਾ ਸੱਚ ਦੀ ਸਮਰੱਥਾ ਦੀ ਸੱਚ ਦੀ ਸੁਭੀ ਦੀ ਕਤਨੀ ਬਦਲੀ ਜੇ ਲੱਗਿਆ ਹੋਇਆ ਉਹਨਾਂ ਜਿਹੜਾ ਅਲ ਕਾਚੇ ਕੱਚੀਆਂ ਗੱਲਾਂ ਕਰਦਾ ਕੱਚੀਆਂ ਗੱਲਾਂ ਸਾਰੀਆਂ ਐਸਾ ਕਾਚਾ ਕੱਚ ਦਾ ਵੀ ਕੱਚ ਹੈ। ਇੱਕ ਤਾਂ ਹੁੰਦਾ ਕੱਚ। ਕੱਚ ਸੱਚ ਦੇ ਨੇੜੇ ਹੁੰਦਾ। ਕੱਚ ਸੱਚ ਦੇ ਨੇੜੇ ਹੁੰਦਾ। ਵੀ ਕੱਚ ਹੁੰਦਾ। ਕੱਚ ਸੱਚ ਦੇ ਨੇੜੇ ਹੁੰਦਾ ਬਹੁਤਾਂ ਦੀ ਦੂਰ ਹੁੰਦਾ। ਆਤਮਾ আর ଶਰੀਰ ਬਹੁਤੇ ਦੂਰ ਦੀ ਹਬਸ ਕੀਤੀ। ਠੀਕ ਹੈ ਆਤਮਾ ਕੁਝ ਨਹੀਂ ਸ਼ਰੀਰ ਕੱਚ ਹੈ, ਆਤਮਾ ਸੱਚ ਹੈ। ਔਖੇ ਦੀ ਹਲ ਪਰ ਜੇ ਸਾਖੀਆਂ ਤੇ ਚਲੇ ਜਾਵੇ ਫਿਰ ਛੱਡ ਕੇ ਫਿਰ ਔਖਾ ਗਾਉ। ਜੇ ਸਾਖੀਆਂ ਤੇ ਚਲੇ ਜਾਵੇ ਫਿਰ ਗਿਆ। ਔਰ ਸਾਖੀਆਂ ਵੀ ਝੂਠੀਆਂ। ਜੇ ਸਾਖੀਆਂ ਝੂਠੀਆਂ ਤੇ ਚਲੇ ਗਿਆ ਫਿਰ ਗਿਆ। ਫਿਰ ਕੱਚ ਨੇ ਕੱਚ ਕੱਚ ਦਾ ਵੀ ਕੱਚ। ਟਿਕਤਾ ਸਾਖੀਆਂ ਬਾਬੇ ਬੁੱਢੇ ਨੇ ਸੁਬ ਚੱਕਿਆ। ਬੋਰਡ ਇਹ ਹਲਾਈ ਤੋੜ ਜੀ ਜੇ ਇਹ ਕਹਿਣ ਲੱਗ ਜਾ ਫਿਰ ਕਾਚੇ ਤੇ ਕਾਚੇ ਫਿਰ ਗਿਆ ਕੀਤੀ ਵਿਚਾਰ ਧਾਰਨ ਗੱਦਾਰੀ ਬਹੁਤ ਬੜੀ ਗੱਦਾਰੀ ਹੈ ਕਹਿਣੀ ਸੀ ਪਰ ਕਦੇ ਸਾਡੇ ਨੂੰ ਘਾਤੀ ਕਿ ਕਾਚੇ ਤੋਂ ਕਾਚੇ ਕਾਚੇ कुचि काच्च। नु पढ़दे कंचन कछ ओहो काछे द कात्या कलते दी जत्ता नु कछ कह दी जा सकदा इक ता गल शरीर दी है थी इक ता कंप्ली दी किसे वे दे राह पैगी फौड़ी संयोग वियोग उपायोन सृष्टि का मूल रचाया हुक्मी सृष्टि साजीन ज्योति ज्योत मिलाया ਸੋ ਅਸ੍ਰੇਤੀ ਰਹੀ ਸੰਯੋਗ ਔਰ ਵਿਜੋਗ ਵਾਸਤੇ ਵਿਜੋਗ ਔਗਣ ਨਾਲਾ ਮਾਇਆ ਦੇ ਬੋਧ ਦੇ ਵਿੱਚੋਂ ਵਿਜੋਗ ਹੈ ਤੇ ਇਸ ਵਿਜੋਗ ਹੈ ਸੱਚ ਨਾਲ ਵਿਜੋਗ ਹੈ ਮਾਇਆ ਤੋਂ ਆਪਸਾ ਹੈ ਸੁਖ ਸੰਗਲਨ ਔਰ ਸਜੋਗ ਹੈ ਇਸ ਕਰਕੇ ਸਿਸ ਪੈਦਾ ਕੀਤੀ ਜੀਵਾਂ ਨੂੰ ਦੇਵਾਂ ਨੂੰ ਬਾਵਨਾ ਦਾ ਜੋ ਕੱਢ ਕੇ ਸੁੱਖਾਂ ਦਾ ਚ ਲੈ ਕੇ ਆਉਣਾ ਹੈ ਇਸ ਜੋਗ ਵਿయోగ ਵਾਸਤੇ ਸ੍ਰਿਸ਼ਟੀ ਪੈਦਾ ਕੀਤੀ ਹੈ ਠੀਕ ਹੈ ਸੰਯੋਗ ਦਾ ਮਤਲਬ ਜੁੜਨਾ ਵਿయోగ ਮਤਲਬ ਟੁੱਟਣਾ ਹੈ ਦਾ ਮਤਲਬ ਦਾ ਜੁੜਨਾ ਠੀਕ ਹੈ ਦਾ ਸਰਵ ਸ੍ਰੇਸ਼ਟ ਜੋਗ ਸਥਾਨ ਆ ਲੱਗਿਆ ਠੀਕ ਹੈ ਅਪਾ ਜਦੋਂ ਸ੍ਰਿਸ਼ਟੀ उपाई ਸੀ ਅਪਾ पवसागर ਸਾਗਰ ਵਿੱਚ ਆਏ ਸੀ ਸੁਖ ਸਾਗਰ ਤੋਂ ਹਾਂਜੀ ਪਵਨਾਂ ਦੇ ਪਹਿਲੇ सी ਜੇ ਦੇਖੇ ਹੋਏ ਆਓ ਇੱਥੇ ਹੀ ਬੰਦ ਹੋ ਗਈ ਸੀ ਜਿਹੜਾ ਬਹੁਤ ਧੇਰ ਇੱਥੇ ਫੇਰ ਸ਼ੁਰੂ ਹੋ ਗਈ ਜਿਹੜੇ ਸੰਯੋਗ ਰਹਿ ਗਏ ਨਾ ਰਾਤ ਪਈ ਸੀ ਜਿਹੜੇ ਕਬਜ਼ਾ ਕਰਦੇ ਨੇ ਇਹਨਾਂ ਨੂੰ ਸੁਖ ਸਾਧਨ ਚਿਖਵੇ ਲੈ ਦੇ ਪੈਦਾ ਕਰਨ ਦਾ ਇੱਕ ਤਰਣ ਠੀਕ ਹੈ ਜੀ ਹੁਕਮੀ ਸ੍ਰਿਸ਼ਟੀ ਸਾਜਿਅਨ ਜੋਤੀ ਜੋਤ ਮਿਲਾਇਆ ਹੁਕਮ ਦੇ ਨਾਲ ਸ੍ਰਿਸ਼ਟੀ ਪੈਦਾ ਕੀਤੀ ਹੈ ਜੋਤੀ ਜੋਤ ਬੁਲਾਈ ਹੈ ਮਾਇਆ ਦੇ ਵਿੱਚ ਜੋਤ ਬੁਲਾਈ ਹੈ ਇੱਕ ਜੋਤੀ ਹੈ ਇੱਕ ਜੋਤ ਹੈ ਏ ਮਾਇਆ ਚ ਬਨਾਈ ਹੈ ਜੋਤੀ ਵੀ ਅੰਦਰ ਹੈ ਜੋਤੀ ਅਲਿਖਤਾ ਜੋਤ ਸ੍ਰਿਸ਼ਟ ਦੇ ਵਿੱਚ ਬਣੀ ਹੋਈ ਹੈ ਦੋ ਇਸ ਤਰ੍ਹਾਂ ਸੱਚੀ ਆਤਮਾ ਜੋਤੀ ਅਜੋਤ ਜੋਤ ਜਿਹੜੀ ਹੈਗੀ ਹੈ ਉਹ ਬਣੇ ਜੋਤੀ ਹੈ ਉਹ ਠੀਕ ਹੈ ਜੋਤੀ ਜੋਤ 몰ਾਈ ਹੈ ਮਾਇਆ ਦੇ ਵਿੱਚ ਇਸ ਕੀਤੀ ਹੈ ਜੋਤੀ ਜੋਤ ਮਾੜਾ ਮਤਲਬ ਹੈ ਮਾਇਆ ਦੇ ਵਿੱਚ ਜੋਤ ਪਾਈ ਹੈ ਇਸ ਜੋਤ ਨੂੰ ਫਿਰ ਮਾਇਆ ਜੋ ਕੱਢ ਕੇ ਜੋਤੀ ਵਿੱਚ ਰਲਾਉਣਾ ਜੀ ਮਾਇਆ ਦਾ ਬੋਝ ਸਮਝ ਕੇ ਉਪਦੇਸ਼ ਛੱਡ ਕੇ ਆਪਣੇ ਜੋਤ ਜੋਤੀ ਦੇ ਆ ਕੇ ਮਿਲ ਜਾਂਦੇ ਜੋ ਕਹਿੰਦੇ ਜੋਤੀ ਵਿੱਚ ਮਿਲ ਜਾਂਦੇ ਆਪਣੇ ਬੂਲ ਇੱਕ ਹੋ ਜਾਂਦੇ ਇੱਕ ਹੋਏ ਫਿਰ ਉੱਪਰ ਐਜੇ ਦਾ ਇੱਕ ਹੋਇਆ ਇਸ ਤਰ੍ਹਾਂ ਹੋ ਗਿਆ ਸੱਚ ਕਰਨ ਤੇ ਗਿਆ ਦੇਵ ਲੋਕ ਜਿਹੜੂ ਸੱਚ ਕਰਨ ਦੀ ਨੂੰ ਕਹਿ ਸਕਦੇ ਉਹਨੂੰ ਦੇਵ ਲੋਕ ਕਹਿੰਦੇ ਨੇ ਜੋਤੀ ਹੂੰ ਸਭ ਚਾਨਣਾ ਸਤਿਗੁਰ ਸ਼ਬਦ ਸੁਣਾਇਆ ਜੋਤੀ ਜਿਹਨੋ ਜੀ ਜੋਤੀ ਕਹਿੰਦੇ ਹਨ ਉਹ ਸਭ ਚਾਨਣਾ ਉਹਦੇ ਵਿੱਚ ਜੋਤ ਵਿੱਚ ਚੱਲਦੀ ਹੈ ਗਲ ਵਿੱਚ ਚੱਲਦੀ ਮਨ ਵਿੱਚ ਚੱਲਦੀ ਰਾਤ ਜੋਤੀ ਨੂੰ ਸਰ ਕਰਨ ਜੋਤੀ ਅੰਦਰ ਬੁੱਧੀ ਅੰਦਰ ਸਮਝਨ ਬਾਹਰ ਆਉਂਦਾ ਨੇ ਤੇ ਬਾਹਰ ਨੇ ਰੂਹ ਹੈ ਰੂਹੇ ਉਦੋਂ ਲੱਤ ਜਾਂਦੀ ਹੈ ਜੋਤੀ ਜੰਦੀ ਅੱਖ ਬੁੱਧ ਜੋਤੀ ਹੂੰ ਸਭ ਚਾਨਣਾ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਸ਼ਬਦ ਸੁਣਾਇਆ ਇਹ ਕਹਿੰਦੇ ਸਤਿਗੁਰਾਂ ਨੇ ਵਾਕੇ अच्छा फोटो पता लगे मतलब पता है कि जो चांदरे छक के किया ठीक है ये फिर जड़ा अवल अल्लाह नूर पाया ये यही ज्योतिरीयो गल हो रही हो थे। है थे हां ये अभी 100 ਕਿ ਮਨ ਨੂੰ ਮਨੀਰ ਕਿਹਾ ਕਿਉਂਕਿ ਉਹਦੀ ਆਪਣੀ ਜੋਤ ਨੀ ਹੁੰਦੀ ਓ ਚੰਦ ਵਾਂਗੂ ਉਹ ਜੋਤ ਲਿੰਦਾ ਕਿ ਤੂੰ ਬਿਲਕੁਲ ਬਿਲਕੁਲ ਠੀਕ ਹੈ ਜੀ ਇਹ ਗੱਲ ਜੋ ਹੈ ਸਤਿਗੁਰ ਨੇ ਦੱਸੀ ਹੈ ਜੀ ਮਹੇਸ਼ ਤ੍ਰੈ ਗੁਣ ਸਿਰ ਧੰਦੇ ਲਾਇਆ ਮਾਇਆ ਕਾ ਮੂਲ ਰਚਾਇਓਨ ਸੁਖ ਪਾਇਆ ਇਹ ਬਰਮਾ ਮਿਸ਼ਨ ਮੇਂ ਇਸ ਤਰ੍ਹਾਂ ਦੇ ਸਮਝੇ ਇਹਨਾਂ ਲੋਗਾਂ ਲੈ ਲੈਣ। ਸਰਹੱਦਾਂ ਦੇ ਪਾਰ ਖਲਕੇ ਇਹ ਤਰਦੇ ਬਣਾਏ ਨੇ ਅਲੱਗ। ਇਹ ਕੋਈ ਅਥਾਰਟੀ ਵੀ ਇਹਨੂੰ ਰੁਕੇ ਸਨੂ। ਸਾਭ ਝੂਠ ਦਾ ਪ੍ਰਚਾਰ ਕੀਤਾ ਹੋਇਆ ਉਹ ਕਹਿੰਦਾ ਆਸਲੀ ਸੱਚ ਇਹ ਸਭ ਨਾ ਠੀਕ ਹੋਗੇ ਨਾ ਠੀਕ ਆਪਣੇ ਆਪਣੇ ਸੰਦੇ ਲੱਗੇ। ਇਹ ਤਤ ਤ੍ਰੈ ਗੁਣ ਦੀ ਗੱਲ ਨਹੀਂ ਦੱਸਦੇ ਵੀ ਇਹ ਤ੍ਰੈ ਗੁਣਾਂ ਤੇ ਤੁਹਾਨੂੰ ਫਸਾਉਂਦੇ ਆ ਬ੍ਰਹਮਾ ਵਿਸ਼ਨੁ ਮਹੇਸ਼ ਤ੍ਰੈ ਗੁਣ ਉਹਦੇ ਆਪਣਾ ਗੋੜਾ ਉਹ ਕਹਿੰਦਾ ਤੁਸੀਂ ਪਾਰ ਕਰ ਜਾਓਗੇ ਉਹ ਕਹਿੰਦਾ ਇਹ ਗੋੜਾ ਇਹ ਤਰੀਕੇ ਨਾਲ ਪਾਰ ਕਰ ਜਾਓ ਮੈਤ੍ਰਿਕਾ ਹੁੰਦਾ ਔਰ ਕੀ ਹੁੰਦਾ ਠੀਕ ਹੈ ਪਰ ਅੱਗੇ ਲਿਖਿਆ ਸਿਰ ਧੰਦਾ ਲਾਇਆ ਇਹ ਕੀ ਗੱਲ ਹੈ ਸਚਾਈ ਨਹੀਂ ਹੈ ਕਤ ਦੇ ਲੱਗੇ ਨੇ ਪਾ ਜਦ ਕਾਮਯਾਬੀ ਉਹ ਨਹੀਂ ਹੋ ਰਹੀ ਜੀ ਜਿਹੜੇ ਤਰੀਕਾ ਨਾਲ ਕਾਮਯਾਬੀ ਨਹੀਂ ਲੱਗੀ ਉਹ ਤੁਹਾਨੂੰ ਬਣ ਜਾਂਦਾ ਹੁੰਦਾ ਠੀਕ ਹੈ ਜੀ ਮਾਇਆ ਕਾ ਮੂਲ ਰਚਾਇਓਨ ਸੁਖ ਪਾਇਆ ਬਾਇਆ ਜ਼ਮੋਰ ਜੀ ਹੱਤਾ ਆਇਆ ਨਹੀਂ ਲੋਕ ਹੈ ਦੀ ਜੈਨੂ ਫੇਰ ਵੀ ਤੁਰੀਆ ਬਾਤ ਜਿਹੜਾ ਚਲਾ ਗਿਆ ਤੁਰੀਆ ਉੱਥੇ ਸੁਖ ਹੈ ਆਇਆ ਤਾਂ ਉੱਪਰ ਉੱਠ ਗਿਆ ਜੇ ਜੋ ਸਭੋ ਜਾਤੋ ਤੇ ਸੁਖ ਹੈ ਜੇ ਜੋ ਤਮ ਸਤੋ ਵਿਖੇ ਸੁਖ ਆਇਆ ਦੀ ਰਾਜ ਗੁੰਦ ਸਾਗ ਗੋਣ ਸਾਤ ਗੋਣ ਚੌਥਾ ਜੀ ਕਹਿੰਦੇ ਪਦ ਪਾਇਆ ਪਰਮ ਪਦ ਪਾਇਆ ਉਹ ਚੌਥਾ ਕੌਣ ਹੈ ਚੌਥਾ ਤੁਰਿਆ ਪਦ ਹੈ ਤੁਰਿਆ ਗਾਤੇ ਜਾਂਦੇ ਨੇ ਦਾ ਤੁਰਿਆ ਚੱਲ ਤੇ ਉਹ ਫਿਰ ਸੁਖ ਸਾਗਰ ਚਲੇ ਗਏ ਜੀ ਤਾਂ ਸੁਖ ਪਾਇਆ ਲਿਗਿਆ ਜੀ ਸੁਖਾਂ ਦਾ ਜਿੰਨੀ ਅਜੇ ਗਿਆ ਕੱਡੇ ਤੇ ਬੈਠਾ ਠੀਕ ਹੈ ਐਸੋ ਵੀ ਤੇ ਘਾਟ ਠੀਕ ਆ ਮਾਰਿਆ ਕਿ ਸੁਖ ਸਾਗਰ ਚਾ ਉੱਥੇ ਬੈਠਾ ਉਹ ਠੀਕ ਉਹ ਕਰ ਤਾਰੋ ਉੱਥੇ ਹਾਂ ਹਾਂ ਉੱਥੇ ਸੁਖਣਾ